ਉਠਾ ਕਰ ਤੂੰ ਪਰ ਅਰਦਾਸ ਤੂੰ ਅਰਦਾਸ ਜਿਸੇ ਕਰਕੇ ਤੇਰੇ ਤੇ ਅਰਦਾਸ ਕਰਤੀ ਹੈ ਤੇਰੇ ਕੇ ਅਸੇ ਅਰਦਾਸ ਕੀਤੀ ਹੈ ਕਿ ਸੇ ਤਨ ਪਦੇ ਚਾਰ ਪਦੇ ਆਮੀ ਰਾਮ ਨਿਵਾਸ ਪਰਮਪਰਮ ਕੀ ਹੈ ਅਰਦਾਸ ਨਾ ਨਾ ਅਰਦਾਸ ਹੀ ਪੂਰੀ ਆਈ ਇਹ ਦੱਸਿਆ ਵੀ ਪਿਛੇ ਅਰਦਾਸ ਕੀਤੀ ਹੈ ਤੇਰੇ ਕੋਲ ਅਰਦਾਸ ਤਾਂ ਕੀਤੀ ਤੂੰ ਉਠਾ ਤੂੰ ਢਾਗਰ ਸਬਦਾ ਦਾ ਪਹਿਲਾ ਕਰਦੀ ਹੋ। ਮੈਂ ਨਾਲੋਂ ਆਪਣ ਕਰ ਕਰੂੰ। ਉਹ ਕਹਿੰਦੇ ਤੂੰ ਵੀ ਜਿਉ ਤੇਰੀ ਰਾਸ ਤੂੰ ਇਹਦਾ ਮਾਲਕ ਹੈ ਤੇਰੇ ਅਗੇ ਹੀ ਅੰਦਰ ਹੈ ਬਚਾਉਣਾ ਹੋਣੀ ਜਿਉ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਉਹ ਬਾਤ ਵਧਾ ਬਾਰਕ ਤੇਰੇ ਇਸ ਤਰੀਕੇ ਨਾਲ ਵੀ ਤੇਰਾ ਹੀ ਫਰਜ ਬਣਦਾ ਇਸ ਤਰੀਕੇ ਨਾਲ ਵੀ ਤੇਰਾ ਹੀ ਫਰਜ ਬਣਦਾ ਬਾਤ ਸਦਾ ਹੀ ਬੰਦੀ ਹੈ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕਿਰਪਾ ਮੈਂ ਸੂਖ ਘਨੇਰੇ ਤੁਮਰੀ ਕਿਰਪਾ ਦੇ ਸੂਖ ਨੇ ਤੇਰੀ ਕਿਰਪਾ ਦੇ ਵਿੱਚ ਆ ਸੁਖ ਤੇ ਸਾਨੂੰ ਪਸੰਦ ਇਸ ਤੇਰੀ ਕਿਰਪਾ ਉੱਤੇ ਕਿਤੇ ਸੁਖੇ ਸੁਖ ਦੇ ਇਸ ਕਰਕੇ ਤੂੰ ਕਿਰਪਾ ਦਾ ਸੋਖ ਦੀ ਬੁਗੜਾਈ, ਤ੍ਰਪਾ ਲੁਗੜਾਈ। ਮੰਗੀ ਕਰਤਾ। ਸੋਖ ਮੰਗਤ ਦੁਖ। ਸਾਦਾ ਹੋਵੇ। ਸੋਖ ਦੀ ਬੁਗਣਾ ਕਰਤਾ ਬੁਗੜੀ। ਉਬਰੀ ਤਰਫਾਂ ਤੇ ਸੋਖ ਖਲੇ ਉਹ ਜੀ ਬੱਬਾ ਜੀ ਦੇ ਵਿੱਚ ਸੋਖ। ਨਾ ਜਾਣੇ ਤੇਰਾ ਸੁਮਰਾ ਅੰਦਰ। ਉਹ ਚੀਜ਼ ਬੁਗਲੀ ਜੀ ਤੇ ਸੋਖ ਸੋਖ ਨਿਕਲੇ ਜਾਂਦੇ ਨੇ। ਸੁਖਾਂ ਦੀ ਖਾਂਗ ਬੁਗਲੀ। ਸੋਖ ਦੀ ਬੁਗਿਆ। ਕਹਨਿ ਰੁਕੀ ਜਬ ਸੁਭਾ ਜਤਰੀ ਕਰੇ ਰਿਹਾ ਹੈ ਤਾਂ ਮੇਰੀ ਕਿਰਪਾ ਮੈ ਸੂਕ ਨਹੀਂ ਰਹੀ ਅਰੇ ਅਰੇ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਤੇਰਾ ਅੰਤ ਕੋਈ ਨਹੀਂ ਜਾਣਦਾ ਉੱਚੇ ਦੇ ਉੱਚਾ ਤੋਂ ਬੰਤ ਜਰ ਉੱਚੇ ਦੇ ਉੱਚਾ ਭਗਵਾਨ ਤੂੰ ਕਿਤਨਾ ਉੱਚਾ ਹੈ ਕਿਤਨਾ ਤੇਰੀ ਉੱਚੀ ਅਸਤਾ ਹੈ ਤੇਰਾ ਕੋ ਗਿਆਨ ਕਿਦ ਹੈ ਤੇਰੇ ਕੋ ਸ਼ਕਤੀ ਕਿੰਨੀ ਹੈ ਸੰਤ ਦਾ ਇਹ ਨਹੀਂ ਗਿਆ ਸਰਦਾਂ ਮੈਂ ਜੇ ਉਹ ਆਪਣੇ ਆਪ ਨੂੰ ਕੋਈ ਸੰਸਾਰ ਦੂਜਾ ਸਭ ਤੋਂ ਡਬਲ ਉੱਤੇ ਵਿਚਾਇਆ ਜੀ ਜਿੱਦਿਆ ਬਤਾਦੇ ਸਦਾਵੀਂ ਜਿੱਦਿਆ ਮਤਾਨੇ ਜਿਹਦੇ ਗਿਆਨ ਦੇ ਜਿਤਨਾ ਗਿਆਨ ਬਿਜਿਆ ਹੋ ਇਹ ਉੱਚ ਉੱਚ ਤੇ ਉੱਚ ਆ ਮਤਾਨੇ ਬਿਤੀ ਜਿਹਦੇ ਉੱਚ ਗਿਆਨ ਨਾ ਘਟਿਆ ਗਿਆ ਤੇ ਉੱਚ ਉਹ ਸਮਗਰੀ ਤੁਮਰੇ ਸੂਤਰ ਧਾਰੀ ਆ ਜਿਹੜੀ ਸਮਗਰੀ ਆ ਸਾਰੀ ਕੋਈ ਸਬੂਤ ਨਹੀਂ ਸਰ ਸਾਹਿਬ ਸਮਗਰੀ ਮੈਟਰ ਆਇਆ ਜੇ ਤਾਤੀ ਨਹੀਂ ਚੌੜਾ ਸੋ ਇਹ ਵੀ ਸਭਨ ਸਮਗਰੀ ਵਾਲਾ ਸਮਗਰੀ ਤੁਮਰੇ ਚ ਤੇਰੇ ਕਰਵਾ ਸੂਤਰ ਕੰਟਰੋਲ ਚ ਸੂਤਰ ਦੇ ਵਿੱਚ ਕੰਟਰੋਲ ਚੱਲਦੀ ਹੈ ਮੂਲ ਚੱਲਦੀ ਹੈ ਨਹੀਂ ਇਹ ਤਾਂ ਬੜੀ ਤਰੀਕਰੇ ਵਸ ਵਿੱਚ ਹੈ ਬੂਰੀ ਅਗਿਆਕਾਰੀ ਹੈ ਅਗਿਆਕਾਰੀ ਕੀ ਜੀ ਮਾਰ ਅਗਿਆਕਾਰੀ ਸੁਤਰ ਵਿੱਚ ਹੈ ਵਸ ਵਿੱਚ ਹੈ ਜੀ ભગવાન ਤੇ ਭਗਵਾਨ ਨੂੰ ਵਿੱਚ ਆਪ ਕੋ ਨੂੰ ਜੇ ਭਗਵਾਨ ਤੇ ਇੱਥੇ ਸਮਝ ਆ ਜਾਵੀ ਕੋਈ ਕਹੋ ਗਿਆ ਭਗਵਾਨ ਤਾਂ ਉਹ ਵੀ ਥਾਗੜੇ ਤੇ ਥਾਗੜੇ ਜਰਾ ਹੈ ਸੂਰਜ ਜਦੋਂ ਖਾਣਾ ਥਾਗੜੇ ਬੁੱਧੀ ਗੋਦੀ ਅਧ ਹੈ ਬੁੱਧੀ ਗੋਦੀ ਪੋੜ ਪ੍ਰਭ ਨੂੰ ਸਤਾਰ ਬੁਰਜਾ ਕਾ ਛੇੜਨ ਲੇ ਫਿਰ ਬੁੱਧੀ ਗੋਦੀ ਹੈ ਇਹਦਾ ਉਹ ਹੀ ਥਾਗੜਾ ਇਹਦਾ ਉਹ ਘਰ ਬਿਠਾ ਗੜਾ ਲੋਕ ਘਰ ਵਾਲਾ ਆਇਆ ਅਰ ਬੁੱਧੀ ਥਾਗੜਾ ਤੂੰ ਮਾਰ ਉਹ ਸਰੂ ਗਿਆ ਆਇਆ ਕਹ ਨਾਲੇ ਤਖਤ ਵੀ ਕਰਦਾ ਸੀ ਆ ਆ ਸਗਲ ਸਮੁਦਰੀ ਤੁਮਰੇ ਸੁੱਤਰ ਧਾਰੀ ਤੋਤੇ ਹੋਏ ਸੋ ਅਗਿਆਕਾਰੀ ਕਿਉਂਕਿ ਜਿਹੜਾ ਪੂਰਬ ਮਰਬਲ ਕੋ ਰੂਪ ਹੈ ਸਾਰਾ ਸਰਬ ਪੂਰਬ ਮਰਬਲ ਹੈ ਹੈਗਾ ਜਿਹੜਾ ਇੱਕ ਭਗਤ ਵੀ ਰਹਿੰਦਾ ਉਸੇ ਆਦੂ ਜਿਹੜਾ ਹਰਦੇਸ਼ ਬਾਝਾ ਜਾਈ ਕੋ ਹੋ ਕੇ ਉਹ ਬਤ ਚੋੜੇ ਇੱਕ ਭਗਤ ਹੈ ਉਹ ਤਾਂ ਦਬਰਾ ਬਰਾਬਰ ਉਹਨਾਂ ਨੂੰ ਕੀ ਦੀ ਬਸਤੇ ਹੀ ਭਗਤਾਂ ਕਿੰਨੇ 90% ਲੋਕ ਸਨ ਹੈ ਉਹ ਤਾਂ ਜੱਟ ਛੱਡਿਆ ਫਿਰ ਉਹ ਉਹ ਆਰੇ ਫਿਰ ਕੋਈ ਨਹੀਂ ਫਿਰ ਇਹ ਜੇ ਕਰਕੇ ਇਹਦੇ ਉੱਪਰ ਅਰਦਾਸ ਅਰਦਾਸ ਹੋ ਕਬੂਰੇ ਦੀ ਕਿ ਨਹੀਂ ਹਾਂ ਕਬੂਰੇ ਅਰਦਾਸ ਆ ਕਬੂਰੇ ਦੀ ਉਹ ਕਬੂਰੇ ਉਹ ਹੁਕਮ ਤਾਂ ਬਦਲ ਲੈ ਕੱਲ ਨੂੰ ਉਹ ਜਿਹੜੇ ਕਾਹਦੇ ਤਾਂ ਫਰਜ਼ੀ ਦਾ ਜੱਦੂ ਹੋ ਤੇ ਫਿਰ ਵੀ ਹਾਕੂ ਪੂਰੇ ਕਰਦੀਆਂ ਜਾ ਕੇ ਨਹੀਂ ਤੇ ਤੂੰ ਭਾਗਤ ਤੋਂ ਪਹਿਰਦਾ ਅਸਰ ਉਹ ਅਪੀਲ ਹੈ ਪਿਛੇ ਹੋ ਮੇਰੇ ਨਾਲ ਪਿਛੇ ਹੋ ਸਾਡੇ ਥੋੜਾ ਜਿਹਾ ਸਾਡੇ ਹੁਕਮ ਹੁਕਮ ਕਰ ਕਹਾਂ ਬਾਤ ਹੈ ਹਵਾ ਸਾਡੇ ਹੱਥ ਚੱਲ ਰਹੀ ਤੁਮਨੇ ਕਰ ਪਾਵੇਂ ਸੁੱਕ ਮੇ ਚਾਹ ਨੂੰ ਲਾਉਗਾ ਉਹ ਕੁੜਾ ਲੈ ਚੋਗੇ ਕੁੜੀ ਹਾਗਮ ਵਰਗਾ ਜੋ ਕੁੜੀ ਨੂੰ ਸਾਗਰ ਧਾਰੀ ਅਜੇ ਸਾਰੇ ਸਮਝਿਆ ਤੇ ਕੰਟਰੋਲ ਚ ਤੁਮ ਹੋਏ ਸੋ ਅਗਿਆਕਾਰੀ ਤੇਜਤ ਤੋਂ ਪੈਦਾ ਹੋਏ ਤੇ ਅਗਰ ਆਦੀਨ ਦਾ ਜਨਮ ਹੋਇਆ ਹੋਵੇ ਹੁਕਮ ਤੋਂ ਪੈਦਾ ਹੋਵੇ ਦੇਖੋ ਹਾਕਮ ਤੋਂ ਪੈਦਾ ਹੋਇਆ ਹੁਕਮ ਤੋਂ ਪੈਦਾ ਹੋਇਆ ਹੁਕਮਦਾਰੀ ਕੋਈ ਪੈਦਾਦਾ ਹੁਕਮ ਤਾਂ ਆ ਪੈਦਾ ਹੁੰਦਾ ਜੇ ਤਾਂ ਉਹ ਹੁਕਮ ਤਾਂ ਆ ਪੈਦਾ ਹੁੰਦਾ ਜਿਹੜਾ ਆ ਪੈਦਾ ਹੁੰਦਾ ਉਹ ਕੋਈ ਨਹੀਂ ਪੈਦਾ ਹੁੰਦਾ ਹਾਕਮ ਤੋਂ ਪੈਦਾ ਹੁੰਦਾ ਨਹੀਂ ਹਾਕਮ ਹੁੰਦਾ ਹਾਕਮ ਤਾਂ ਹੁੰਦਾ ਹਾਕਮ ਦੀ ਇੱਛਾ ਨਾਲ ਬੈਲਾ ਹੋਏ ਹਾਕਮ ਦੀ ਇੱਛਾ ਹੀ ਹੁਕਮ ਹੋਵੇਗਾ। ਉਹ ਗਿਆ ਕਰੀ। ਉਹ ਜੇ ਤੱਕ ਆ ਗਿਆ ਕਿਦਨ ਬਾਹਰ ਕੇ ਬਚਾ ਜਾਊਗਾ। ਮਹਾਲਾ ਜੇ ਸਭ ਬਾਹਰ ਕਾਲਿਆ। ਉਹ ਤਾਂ। ਚੋਖਣੀ ਚੋਖ। ਤੋਂ ਦੇ ਅਗਲੇ ਜੇ ਬੋਲੇ ਖੇਤਰ ਦਾ ਹੋ। ਪਛੰਦੀ ਨਾ ਜਾਏਗਾ। ਜੋਰ ਦੇ ਰੱਖਦਾ ਉਹ ਡਾਕਟਰ ਟੋਲ ਲੈ ਉਹਦਾ। ਹੈ ਜੇ ਕੋਲ ਕੰਟਰੋਲ ਹੋ ਜੇ। ਉਹਦਾ ਕੋਈ ਨਾ ਰੋਈ ਉਹਦਾ ਹੁੰਦਾ ਹੀ ਫੋਨ ਨਹੀਂ ਲੱਗਦਾ ਤਪਤੇ ਹੋਏ ਜੋ ਅੱਗੇ ਜੋ ਤਪਤੇ ਹੋਏ ਸੱਚੇ ਤੇ ਪਵਨਾ ਤੇ ਆਇਆ ਪੈਦਾ ਜੜ ਤਾਂ ਅਵਲਨ ਨੂੰ ਰੂਪਾਇਆ ਪੈਦਾ ਹੋਏ ਸਭ ਤੇ ਲੱਗ ਗਿਆ ਕੋਈ ਆ ਤੇ ਬਾਜੀ ਫਿਰ ਵਿੱਚ ਸਭ ਨੂੰ ਸੂਰ ਵਿੱਚ ਸਭ ਨੇ ਫਾਇਦਾ ਤਾਉਨ ਦੀ ਤਰ੍ਹਾਂ ਤੇ ਪਰ ਆਗਿਆ ਚਲੂ ਨਹੀਂ ਕੀ ਜੜ ਕੀ ਜੇ ਤੱਕ ਦਰਵਾਜ਼ਾ ਕੀ ਮਤਲਬ ਹੋਏ ਲਾਹਣ ਕਰੀ ਸਵਾਣ ਕਰੀ ਜਿਹੜਾ ਕੋ ਪ੍ਰੋਗਰਾਮ ਆ ਉਹਦੀ ਆਗਿਆ ਚ ਚੱਲਦਾ ਰਹੇ ਪ੍ਰੋਗਰਾਮ ਉਹ ਆਗਿਆ ਚ ਚੱਲਦਾ ਜੀ ਇਹਨੂੰ ਬੜਾ ਬੰਗੜੇ ਪੀਤਾ ਹੁਣ ਜਦ ਮੈਂ ਚਲਾਉਂਦਾ ਹੈ ਲੇਕਿਨ ਕੀ ਖੋਦ ਉਹ ਉਹ ਖੋਦਦਾ ਹੈ ਕੁੱਝ ਨਾ ਆਵੇ ਆਵੇਗਾ ਮੈਂ ਚਲਾਉਂਦਾ ਵੀ ਤਾਂ ਆਜੇ ਨੇ ਭਲਾਇਆ ਠੀਕ ਜਿਹੜੇ ਪਰਬਤ ਤੇ ਭਲਾਇਆ ਹੋਏ ਨੇ ਤਾਂ ਉਹ ਵੀ ਆ ਗਿਆ ਕਰ ਗਈ ਹੈ ਮੁਰੂਨ ਬਤਾ ਦਿੰਦਾ ਹਾਂ ਉਹ ਬੜੇ ਨੇ ਜੀ ਬੜੇ ਜਿਹੜੇ ਪਰਬਤ ਪਰਬਤ ਜਿਹਨੂੰ ਹੋਏ ਉਹ ਉਹਨਾਂ ਨੇ ਪਰਬਤੋਂ ਸੀ ਆਪਣੀ ਅਗਰ ਚੱਲਦੇ ਆਈ ਪਰਬਤੋਂ ਆਸਲੀ ਜੋ ਬਰਦਰੋ ਹੈ ਨਹੀਂ ਬਾਦ ਵਿੱਚ ਕਹਿੰਦੇ ਇਹ ਪਰਮਾ ਇਸਾ ਜੈਸਾ ਆਮਨੀ ਹੋ ਜਾਂਦਾ ਜੈਸਾ ਆਮਨੀ ਹੋ ਜਾਂਦਾ ਅਸਲ ਤਾਂ ਸੁਭਿਦਨੇ ਵੀ ਅਸੀਂ ਆਪਣੇ ਭਾਲੀ ਚਾਹਦੇ ਐਸੀ ਗੱਲ ਹੈ ਜੀ ਇਹਨੂੰ ਵਰਤਣਾ ਜੀ ਜਿਹੜਾ ਸੁਭਿਦਾ ਵੀ ਮੈਂ ਚਾਹਦਾ ਦੀ ਆਪਣੇ ਕੋਸ਼ੂ ਨੂੰ ਕਰਦੇ ਚਾਹਦਾ ਨਹੀਂ ਹੋ ਗੋ ਕੋਕੁੰਦੇ ਬਾਹਰ ਚਲਣ ਦੀ ਕੋਸ਼ਿਸ਼ ਇੱਛਾ ਰੱਖਦੇ ਨੇ ਚਲਣ ਦੀ ਚੱਲ ਨਹੀਂ ਸਕਦੇ ਕੋਈ ਕੋਈ ਕੰਮ ਉਹਨਾਂ ਦੀ ਇੱਛਾ ਦਾ ਜਰਾ ਹੋ ਜਾਵੇ ਉਹਨੂੰ ਖੜਾ ਹੋ ਜਾਵੇ ਨਹੀਂ ਸਾਰਾ ਵੀ ਕੁਝ ਹੋ ਸਕਦਾ ਉਹ ਆਪਣੇ ਘਰ ਨੂੰ ਬਰਦਾ ਜਿੰਨਾ ਜੇਰ ਪੜਦਾ ਉਹਨਾਂ ਦੇ ਜਨਮ ਹੈ ਆਪ ਜਨਮ ਹੈ ਉਬਰਾਹਮੀ ਗੋਤੀਤਾ ਸਾਨੂੰ ਪਰਬਰ ਉਬਰਾਹਮ ਹੋ ਗਿਆ ਪਰਬ ਤੋਂ ਉਹ ਅਬਰਾਹਮ ਤਾਂ ਕੋਈ ਕੀਤਾ ਹੀ ਨਹੀਂ ਅਬਰਾਹਮ ਅਸੀਂ ਕਰ ਨਹੀਂ ਸਕਦੇ ਆ ਉਬਰਾਹਮ ਸੋਚ ਸਕਦਾ ਨਾ ਕਰ ਨਹੀਂ ਸਕਦੇ ਉਹਰਾ ਸੋਚ ਸਕਦੇ ਨਾ ਕਰ ਨਹੀਂ ਸਕਦੇ ਸੋਚਣਾ ਹੀ ਪਰਬ ਇਹਨਾਂ ਨੂੰ ਉਬਰਾਹਮ ਪਾਉਂਦੇ ਹੀ ਪਰਬ ਇਹ ਛੱਡਣ ਹੋਣੇ ਅਗਲੇ ਦਮ ਤਾਂ ਪਰਬਦੂਰੋ ਪਰਬਦੂਰ ਕਹਦਾ ਇਹ ਗੁਰ ਪ੍ਰਸਾਦ ਪਰਮ ਕਾ ਨਾਮ ਸਤਿਗੁਰ ਤੇ ਜੇ ਪਰਮ ਨਰਾਦਰ ਤੋਂ ਨਾ ਪ੍ਰਸਾਦ ਉਹ ਜਿਹੜੇ ਕਹਿੰਦੇ ਸੀ ਅਸੀਂ ਕਰਤੀ ਕੀਤੀ ਆ ਉਹ ਦਿੱਤੇ ਫਿਰ ਦਫਾਸ ਕੀਤਾ ਉਹ ਤਾਂ ਬਾਤ ਕਰਦੇ ਇਹੋ ਜਿੱਥੇ ਕੋਈ ਵੀ ਠੀਕਾ ਫਿਰ ਤੇ ਕਹਿੰਦੇ ਆ ਫਿਰ ਤੋਂ ਬਾਤ ਉਹਦੇ ਨਾਲ ਜਿੱਕਰ ਨਹੀਂ ਪਰਬਦੂਰ ਪਰਬਦੂਰ ਜੋਈ ਘਟਨ ਤੇ ਪਾਪ ਨੂੰ ਹਮਾਰੇ ਵੱਸ ਮੈਂ ਦੋਹੇ ਲੇ। ਨਾ ਪਾਪ। ਨਾ ਚੰਗਾ ਨਾ ਮਾੜਾ। ਅੱਜ ਤੁਹਾਨੂੰ ਤੇ ਨਾਮ ਕੀਆ। ਆਹ ਤੇ ਕੀਤਾ ਪਰਪਲ ਵੀ ਕੀਤਾ। ਜੋ ਜਦ ਡੇਬ ਸੋਚੀ ਉਹ ਡੇਬ ਚੀਜ਼ ਪ੍ਰਾਪਤ ਹੋ ਗਈ ਪਰ ਫਾਇਦਾ ਹੋ ਗਿਆ ਉਹਨੇ ਡੇਬ ਜੋ ਚੀਜ਼ ਪ੍ਰਾਪਤ ਕਰ ਲਿਆ ਚਾਹੁੰਦਾ ਨਹੀਂ ਲਾ ਪਾਇਆ ਖਿਆਨ ਬਚਾ ਕੇ ਵਿਚ ਚਾਹੁੰਦਾ ਪਾ ਲਿਆ ਸਭ ਜਾਂਦਾ ਚੱਲ ਇਹ ਚ ਸੀ ਇਹ ਦੇਖ ਸਰੋ ਫਾ ਗਿਜੋੜਾ ਨਾ ਤੋਂ ਬਸ ਚੋਣ ਚਲੇ ਆ ਨੈਗੇਟਿਵ ਹੋਦਾ ਜੁਰਾ ਨੈਗੇਟਿਵ ਚੱਟ ਕੇ ਪੋਜ਼ਿਟਿਵ ਨਹੀਂ ਹੋੜ ਹੈ ਫੈਕਟਰ ਤਾਂ ਚਲੇ ਹੀ ਜਾਂਦਾ ਨਾ ਹੈ ਉਹ ਉਹ ਤਾਂ ਲਾਈਨ ਬਦਲਦੀ ਨੇ ਕਿ ਜੀ ਥੋੜੇ ਤਾਂ ਕਰਨਾ ਨਹੀਂ ਕਰਮ ਨਹੀਂ ਕਰ ਸਕਦਾ ਕਰਮ ਹੈ ਉਹ ਜਿਹੜਾ ਤੇ ਚੋਦ ਨੂੰ ਅੰਗਰੀ ਜਾਮਾ ਨਹੀਂ ਪਹਿਨਦਾ ਉਹ ਹੁੰਦਾ ਜੇ ਵਿਰੋਧ ਕੀਤਾ ਨਾ ਵਿਰੋਧ ਤਾਂ ਫੜਵਾ ਲਿਆ ਜੇ ਹੁਕਮ ਦੇ ਅਨਸਾਰ ਕਰੇ ਉਹ ਫੜਵਾ ਲਿਆ ਬਸ ਉਹ ਫੜ ਗਿਆ ਨਹੀਂ ਕੁਛ ਕਰਨ ਵਾਸਤੇ ਸੁਚੇਵੰਦ ਦਾ ਪੰਡ ਨਹੀਂ ਪਹਿਲਾ ਸੋਚਣਾ ਪੈਂਦਾ ਹੌਲੀ ਹੌਲੀ ਫੜਵਾਉਣਾ ਪੈਂਦਾ ਹੌਲੀ ਹੌਲੀ ਸਵਛਤਾ ਵੀ ਆ ਜਾਂਦੀ ਹੈ ਆਇਆ ਸੋਦਾ ਛਾਛਾ ਇਹ ਸਾਬਤ ਤਾਂ ਤਾਂ ਬੇਲ ਨਹੀਂ ਬਤਾਇਆ ਇਹ ਸਾਬਤ ਤਾਂ ਤਾਂ ਬੇਲ ਨਹੀਂ ਕਿ ਦੋਦੀਵਾਲ ਹੈ ਬੇਲਾ ਦੱਸ ਬੇਲਾ ਦੱਸ ਕੀ ਪਾਇਆ ਕੀ ਆ ਉਹ ਪਾਇਆ ਪਾਇਆ ਤਾਂ ਪਾਇਆ ਉਹ ਨਿਕਲਿਆ ਬਿਗਿਆਨ ਵਿਗਿਆਨ ਦੀ ਗੱਲ ਲੱਗਦੀ ਪਾਇਆ ਇਹ ਦੁੱਖ ਪਾਲਿਆ ਸੁਖ ਮਾਰਿਆ ਚਲੋ ਦੁੱਖ ਪਾਲਿਆ ਸੁਖ ਪਾਲਿਆ ਅਗਿਆਨਤਾ ਜੋ ਦੁੱਖ ਬਣਨਾ ਗਿਆਨ ਜੋ ਸੁਖ ਬਣਨਾ ਇਹ ਕੋਈ ਐਡਮਿਟੇ ਕਰ ਰਹੀ ਹੈ ਜਿਹੜਾ ਕੋਈ ਆ ਹੋਣਾ ਪਾਣਾ ਕਿ ਆਪਣੇ ਪਾਸ ਚੱਲਿਆ ਤੇ ਜੱਟੋਟਾ ਘਰ ਘੁਰ ਕੇ ਪਾਣੀ ਜਾਨੀ ਉਹ ਜਿਹੜਾ ਨਾ ਆਪਣੇ ਅੰਦਰ ਆਪਣਾ ਵਿਕਾਸ ਕਰੇ ਉਹ ਗੱਲ ਨੂੰ ਹੀ ਇਹੋ ਹੋ ਦੱਸਿਆ ਉਹ ਹੀ ਪਾਇਆ ਜਿਹੜੀ ਤੇ ਕੁਝ ਸਹਿਣਾ ਥੋੜੀ ਨਹੀਂ ਸਜਾ ਦੀ ਕੋਈ ਪੰਜ ਜੁਮਰੇ ਗੱਤ ਤੋਂ ਨਾਨਕ ਦਾਸ ਸਦਾ ਕਰਵਾਦੇ ਤੁਹਾਰੇ ਰਾਸ ਤੋਂ ਤਾਂ ਹੀ ਯਾਨੀ ਤੇਰੀ ਕਹਾਣੀ ਹੈ ਤੇਰੀ ਬੁੱਧੀ ਤੇਰੇ ਬੰਦੇ ਉਹ ਕੀ ਕਰ ਰਹੇ ਨੇ ਟੀਕਾ ਦੁਵਾਲੇ ਇਹਨੂੰ ਕੱਟ ਮਿਟਾ ਦੇ ਉਹ ਕੀ ਕਰ ਰਹੇ ਨੇ ਟੀਕਾ ਦੁਵਾਲੇ ਜੋ ਪਿੱਛੇ ਉਹਦਾ ਪੜਾ ਕੇ ਟੀਕਾ ਦੁਵਾਲਾ ਏਡੀ ਦਾ ਟੀਕਾ ਲਾ ਦੇ ਟੀਕਾ ਦੁਵਾਲਾ ਕਹਿ ਸਕਦੇ ਆਂ ਜੋ ਕਰ ਦਿੱਤਾ ਉਹ ਤਾਂ ਹੋ ਗਿਆ ਨੂੰ ਸਮਝਣੀ ਵਾਲਾ ਵੀ ਚੱਜਾ ਜੋ ਹੋ ਲੋ ਖੌਲਮ ਕੀ ਉਹਦੇ ਬਾਅਦ ਕੀ ਪ੍ਰੋਗਰਾਮ ਚੱਲ ਰਿਹਾ ਇਸ ਤਰ੍ਹਾਂ ਉਹ ਜੋ ਹੋ ਗਿਆ ਉਹ ਸਭ ਤੋਂ ਸਭ ਲੋ ਜੋ ਵਰਤ ਗਿਆ ਉਹ ਭੰਡ ਸਦੀ ਵਰਤਿਆ ਉਹ ਤੇਨੋਂ ਬਗਤੀ ਨਾ ਤੂੰ ਵੀ ਜਾਲੀ ਦਾ ਅਕਦਾਸ ਸਦਾ ਕਰਦਾ ਨਾ ਲਾਤਾ ਕਰਵਾਦੀ ਹਦ ਰਿਤੇ ਗੂੜਾ ਕਰ ਉਧਰ ਵਫਰ ਜਾਂਦੀ ਹੈ ਬੰਦਾ ਬਾਤ ਚ ਲੱਗਦਾ ਪਹਿਲੋਂ ਪਤਾ ਹੀ ਨਹੀਂ ਅਪਰਾ ਕੀਆ ਹਰ ਕਰੇ ਜੋ ਮੇਰੇ ਜਤਨ ਹੋ ਉਹ ਬਦਲ ਕੇ ਹਾਂ ਜਦੋਂ ਉਹ ਜਿਹੜਾ ਮੇਰਾ ਜੰਗਾ ਆਪਣਾ ਟਿਕਾ ਕਰ ਗਿਆ। ਕਿਆ ਹੋ ਜਿਤ ਨੂੰ ਹੋਏ। ਕਿਆ ਹੋ ਜਿਤੂ ਜਿਤ ਬੜੀ। ਕਿਆ ਮੇਰੇ ਜੰਗਾ ਹੋਏ। ਆਪਣਾ ਦੇਸ ਹੈ ਹਰ ਉਹ ਗਾਇਰ ਐਸੇ ਉਹਨਾਂ ਦੇ ਲਾਡਲੇ ਵੇਖਾਂ। ਜਗਾ ਜਗਾ ਤੋਂ ਮਦਦ ਮਿਲਦੀ ਐ ਸੋਮੇਰ ਮਾਫੀ ਜਿਹਾ ਸਭ ਤਾਂ ਇਹਨੋਂ ਔਰ ਨੰਪੁਆਇੰਟ ਕਿਤੇ ਸੁੱਤਦੇ ਵਿੱਚ ਕੋਈ ਆ ਗਿਆ ਸਵਾਲ ਪੁੱਛਣ ਆ ਗਿਆ। ਪੂਰਾ ਤਾਂ ਹੋਰ ਰੋਸ਼ਨੀ ਪਾਈ ਗਈ। ਉਹ ਠੀਕ ਐ ਫਿਰ ਜਿਹੜੀ ਕਵੀਰ ਦੀ ਬਣੀ ਪਹਿਲਾਂ ਆਪਾਂ ਕੇ ਸਾਰਾ ਪਾਸੇ ਉਹਦੀ ਮਦਦ ਉਹ ਦੇ ਪਹਿਲਾਂ ਜਿਹੜੇ 15 ਸਾਲ ਬਹਿ ਲਾਇਆ ਨੇ ਤਾਂ ਲੱਗੂ ਹੀ ਨਹੀਂ ਸੀ ਮਨੋਂ ਉਹੀ ਜੀ ਦੀ ਵੱਲ ਕਰਨਾ ਸੁਖੀ ਦਾ ਵੀਰ ਲੈ ਬਹੁਤ ਕੁਝ ਐਸਾ ਜਿਹੜਾ ਗੁਨਾਹ ਕਰਨ ਸੁਖੀਰ ਆਲਾ ਚੱਕਿਆ ਦੀ ਹੈ ਕਿ ਕੱਢੀ ਲੋੜੀ ਭਈ ਕੁਝ ਭੱਜਣ ਬਾਜ਼ਾਂ ਦੇ ਚੱਕਿਆ ਕਿਤੇ ਆ ਕੇ ਕੋਈ ਜੀ ਨਹੀਂ ਨਾ ਵਾਹ ਨਾਲੇ ਚੱਪਦੇ ਹੀ ਰਹੇ ਮੈਂ ਤੂੰ ਇਹ ਚੋਰੀ ਕੋਈ ਸਵਾਲ ਜ਼ਮੇਤਨ ਨੂੰ ਉਧਾਰ ਰਹਿਦਾ ਨਹੀਂ ਕਿ ਕੋਈ ਸ਼ਕਤਾ ਉਦੀ ਰਹੀ ਜਾਂ ਫਿਰ ਪ੍ਰੈਕਲਿਫਿਕੇਸ਼ਨ ਉਦੀ ਰਹੀ ਪਹਿਲੇ ਪਾਣੇ ਘਰ ਘਰਾਂ ਦੇ ਵੀਰਾਂ ਲਈ ਚੱਕ ਕੇ ਫੇਰ ਹਾਂ ਫਿਰ ਉਹ ਆਦਾਂਤਾ ਹੈ ਕਵੀਰ ਆਦਾ ਉਹ ਹੰਤਾ ਜਾਣਿਆ ਵੀ ਕਹਿੰਦਾ ਆਦਾ ਝੜੇ ਜੋ ਜੀ ਨਾ ਕਿ ਬਰਤੇ ਹੈ ਸਰ ਉਹ ਲਾ ਨੂੰ ਉਰ ਤੋਂ ਉਰ ਤੋਂ ਲਿਖੀਏ ਤਾਂ ਮੈਂ ਅੱਜ ਨਾਉਂ ਚਾਹੁੰਦਾ ਮਤਲਬ ਬੰਨੀ ਕਵੀਰ ਦੀ ਹੋਈ ਉਹ ਨਾ ਆਪ ਬੋਲਦਾ ਸਭ ਸਾਰੇ ਮੰਨਦੇ ਨੇ ਸਭ ਨੂੰ ਮੰਨਦਾ ਹੀ ਗੱਲ ਹੈ ਸਭ ਤੇ ਕੋਈ ਜਿਵੇਂ ਬਣੇ ਸਾਰੇ ਕੋਲ ਹੈ ਤਾਂ ਸਭ ਜਾਲੀ ਬਣੇ ਬੜੀ ਪਾਣੀ ਇਕੱਤਰ ਹੋਈ ਕਿਵੇਂ ਕੀਤੀ ਉਹਦੇ ਵਿੱਚ ਉਹਨੇ ਸਾਹਬ ਜੀ ਨੇ ਲਿਖਿਆ ਹਾਂ ਉਹ ਤਾਂ ਗੱਲ ਹੈ ਜੀ ਇਹ ਪੰਕੀਆਂ ਦਾ ਅੱਗੇ ਮਿਕਾਣਾ ਵੀ ਆ ਪੰਕੀਆਂ ਐ ਕਹਿੰਦੀ ਆ ਇਹਦਾ ਮੰਦਵਾਰ ਉਹ ਹੈ ਕਿ ਗੱਲ ਦੇਖੋ ਸੂਤਰ ਕੋ ਪਾਸ ਗੱਲ ਹੈ ਤੁਸੀਂ ਜਿਹੜੀ ਪੜਿਆ ਨਾਂ ਨਾ ਕਹਿਦਾ ਆਕੇ ਸੀ ਸਿਰੇ ਚੌਕੇ ਦੀ ਗੱਲ ਸੀ ਉਹਦੀ ਤਿਆਖਾ ਹੋਣੀ ਸੀ ਦਿੱਤੀ ਸਮਝਿਆ ਗੱਲ ਸੀ ਵੱਡੀ ਇਹ ਦੁਬਾਰਾ ਫੇਚਕੀ ਸ਼ੁਰੂ ਕਰ ਦੇ ਰਹੇ ਇਹ ਜਿਹੇ ਪੁਆਇੰਟ ਜਿਆਦਾ ਚੱਕੇ ਨੇ ਦੇ ਦੇ ਜਦੋਂ ਕਿ ਚੱਲੇ ਆਲੇ ਦੇ ਜਿਹੜੇ ਚੱਕੇ ਆ ਜਿਆਦਾ ਚੱਕੇ ਦੁਆਰਾ ਚੱਲਦਾ ਵੀ ਚੱਕਦਾ ਨਾਮ ਨਹੀਂ ਚੱਕਦਾ ਇਹਦੀ وجہ ਨਾਲ ਉਹ ਗੁਰਬਾਣੀ ਨੂੰ ਦੇ ਰੋੜੀ ਸੀ ਤੇ ਜਗਾ ਜਿਹੜਾ ਹੈਗਾ ਉਹ ਆਪਣੀ ਹੋ ਚੁੱਕੀ ਹੈ ਸਾਇਮ ਬਰਾਬਰ ਰਹਾ ਸੀ ਪਹਿਲਾਂ ਬਰਾਬਰ ਦਾ ਰੋਦੇ ਸੀਗਾ ਬੀਬੀ ਜਾਂਦਾ ਜਦਾਂ ਸਿੰਘ ਚੀ ਜਾਂਦਾ ਉੱਚੀ ਬੀਬੀ ਦਾ ਫਰਕ ਹੈ ਦੀ ਮਟੌੜ ਲੰਦਾ ਸੀ ਚਾਰ ਬਾਣ ਵਾਲੀ ਗੱਲ ਨਹੀਂ ਸੀ ਬਦਲਦੇ ਸੀ ਹਾਂ ਚਾਰ ਬਾਣ ਵਾਲੀ ਗੱਲ ਬਹੁਤ ਜੀ ਜਾਣੀ ਨਾਨਕ ਦਾ ਸਦਾ ਕਰਵਾ ਤੁਸੀਂ ਗਤ ਦਾ ਸਦਾ ਕਰਵਾ ਸਦਾ ਕਰਵਾ ਜਾ ਸਕਦਾ ਤੇਰੀ ਗਤ ਵਿੱਚ ਸਾਰੇ ਰਿੜੀ ਤੈਨੂੰ ਬੋਤਾਦਾ ਸਾਹ ਹੁਣ ਕੀ ਕਰ ਉਹਦੇ ਬਾਅਦ ਕੀ ਕਰਨਾ ਉਹਦੇ ਬਾਅਦ ਕੀ ਕਰਨਾ ਉਹਦੇ ਅਗੇ ਰਹਿਣਾ ਥੋਕਾ ਕਰਾਈ ਕਾਂਜੂਲੀ ਗੱਲਾਂ ਨਾਲ ਸਾਰਨ ਜਲਾ ਹੈ ਜੀ